ਹਰ ਜੀਾਸਤਰੀ ਦਸ ਦਸ ਤੋਂ ਲੈ ਪਾਛੇ ਭਾਵੇ ਇੱਕ ਵਸਤ ਕਾਰਨ ਵਿਖੋਟ ਗਵਾਉ ਇਹ ਬਿਲਕੁਲ ਬੇਤਵਾਰਾ ਹੈ ਬੱਚੇ ਜਦ ਅਰੇ ਮੰਗੀ ਜਾਂਦਾ ਹੈ ਉਹ ਕਿਹਾ ਇਹ ਤਾਂ ਇਹ ਚੀਜ਼ ਮੰਗੀ ਦੋ ਉਹ ਜਿੰਨਾ ਚਿਰ ਮੰਗੀਆਂ ਤੇ ਅਦਾ ਹੋ ਗਾ ਅਦਾ ਜੀਆਂ ਗੱਲਾਂ ਨੂੰ ਨਹੀਂ ਦੱਸ ਸਕਦਾ ਜੇ ਕੋਈ ਇੱਕ ਹੋਈ ਨਾ ਜਦੇ ਫੋੜਾ ਜਾਂਦੀ ਕੋਈ ਬੁਰਾ ਸੱਚੇ ਨੂੰ ਛੱਡ ਕੇ ਝੂਠੇ ਵਿੱਚ ਲੱਗਦਾ ਕਹਿੰਦਾ ਤਾਂ ਚਾਰਿਥੇ ਸੱਚੀ ਹਾਲਾ ਨਾ ਨਾ ਮਮਕਾ ਉਹਦਾ ਖਬਰ ਜੇ ਕਰਦੀ ਉਹ ਹੈ ਉਹ ਕਹਿੰਦਾ ਪਾਈ ਮੇਰੇ ਅੱਤੇ ਜਾ ਹੈ ਅਰਦਾਸ ਕਰਦਾ ਮੈਂ ਜੇ ਪਰਮੇਸ਼ਰ ਨੂੰ ਕਹੂੰ ਉਹਨੇ ਕਿਹਾ ਕਿ ਪਰਮੇਸ਼ਰ ਨੇ ਨਹੀਂ ਮਤਿ ਕਰੀ ਅਰਦਾਸ ਕੋਈ ਕਰ ਕਰਿਆ ਕਰ ਪੂਰੀ ਹੋ ਜਾਊਗੀ ਲੋਕਾਂ ਨੂੰ ਲੋੜ ਜਵਾਬ ਦੇ ਵਿੱਚ ਪਰਮੈਸ਼ਰ ਜੋੜਦਾ ਹੁੰਦਾ ਹੈ ਉਹ ਜਦੋਂ ਆ ਕੰਕਰ ਦੇਣਾ ਨਾ ਇਹ ਅਖਾੜ ਬਾੜ ਦਾ ਚਾਇਆ ਦਾ ਸੌ ਕਰਦਾ ਜੀ ਬੁੱਢਾ ਜੀ ਹਿੰਦਾ ਹੋ ਗਿਆ ਕਿ ਇਹ ਜਿਹੜੇ ਕੋਈ ਲੋਕ ਨਾ ਨਾ ਯਾਦੋਂ ਵਿੱਚ ਅਖੜਾ ਹੁੰਦਾ ਨਾ ਜਿਹਦਾ ਪੰਥ ਚਲਾ ਟਾਪਿਕ ਜੱਜਪੁਰ ਤੋਂ ਕਰਦਾ ਇਹ ਕੋਈ ਚਾਲੂ ਦੱਸ ਇਹ ਸਾਡੇ ਜੀ ਨੂੰ ਜਾਣਦੇ ਸਨੇ ਪਾਇਆ ਰੋਜ਼ੀ ਤੇ ਰੋਜ਼ੀ ਜਨਦੀ ਦਾ ਰਖਾਣਾ ਕਰਾ ਲੇਕੀਆ ਆਹ ਕਹਿ ਵੀ ਨੂੰ ਆਪਣੇ ਉੱਤੇ ਲੇਕੀਆ ਆ ਬਾਰੇ ਜੀ ਜੇ ਪੈਸੇ ਕਰਕੇ ਆਇਆ ਇੱਕ ਰੌਦਾ ਹੈ ਅਲਾਦ ਰੌਦਾ ਨਹੀਂ ਖਲਾਬਤੀ ਜਲਦੀ ਹੋ ਗਈ ਜੀ ਬਾਦਮੀ ਨਹੀਂ ਬੈਠੂਗਾ ਤੇ ਬਹੁਤ ਜਾਣਦੇ ਤੇ ਸੋਰੀ ਸ਼ਾਂਤਾ ਮੋਦੀ ਜੀ ਨੇ ਕਿਹਾ ਵੀ ਮੈਂ ਇਹ ਕਾਲ ਹੋ ਗਈ ਸੀ ਜਾਣ ਆਣੋ ਜੈਦਾ ਕੇ ਸੁਖਾ ਦਾ ਰਾਸ ਕਰੀ ਜੂਗਾ ਉਹ ਤਾਂ ਕੋਈ ਨਹੀਂ ਜੂਗਾ ਰਾਸ ਕਹਣਾ ਕੋਈ ਕਾਜੋ ਪੂਰੀ ਹੋ ਜਾਂਦੀ ਜੇ ਕੱਲ ਨਾ ਤੇ ਕੋਮਨਿਕਟਰ ਤੋਂ ਹੋ ਕੇ ਕਰੇ ਉਹਦਾ ਕਾਜ ਪੂਰੀ ਹੋ ਜਾਂਦੀ ਇਹ ਪਰ ਦੇਖੋ ਜਿਹੜਾ ਦਾ ਇਹਨਾਂ ਦਾ ਇਹਨਾਂ ਦਾ ਜਸਰ ਨੂੰ ਪਰੇਸਰ ਜੀ ਕਿਹਦਾ ਰਾਤ ਕਰਾਇਆ ਤੁਹਾਨੂੰ ਤੁਹਾਨੂੰ ਸੋਪੋ ਜੋ ਤਿਆਰ ਨਾ ਕਿ ਨਹੀਂ ਤੇ ਕਰਾਇਓ ਕਾਜ ਜੋ ਇਹੋ ਜਿਹੇ ਅੰਦਰਜੀਤ ਜੀ ਹਾਂ ਤੇ ਨਾਲੇ ਜਦੋਂ ਮੈਂ ਲੈਂਦੀ ਸੀ ਤੇ ਜਦੋਂ ਕਹਿੰਦੀ ਕਿ ਇਹ ਜੀ ਆਵਾਜ਼ ਉਹ ਸੁਖਾ ਕੇ ਲੜਦਾ ਜਦੋਂ ਕਹਿੰਦੇ ਵੀ ਹੰਕਾਰ ਸੀ ਉਹ ਠੀਕ ਕਹਿੰਦੇ ਸੀ ਪਰ ਮੈਂ ਉਹਨੂੰ ਇਹ ਪੁੱਛਿਆ ਉਹਨੂੰ ਅਸਲ ਇਹ ਜਿਹੜੀ ਦਾ ਇੱਕ ਜ਼ਰੂਰੀ ਸੀਗਾ ਇਹ ਦਾਜ ਜੀ ਕੰਦੇਰ ਦਾ ਦਸੋਚੀ ਸਰਦਾਰ ਜੀ ਦਸ ਵਸਤੂ ਲੈ ਪਾਸੇ ਪਾਵੇ ਇੱਕ ਵਸਤੂ ਕਰ ਨੂੰ ਵਿਟੋੜ ਦਵਾ ਇੱਕ ਵਸਤੂ ਮਿਲਿਆ ਨਾ ਕੋਈ ਚੈਲ ਹੋਇਆ ਲੰਮਾ ਲਾਉਣ ਵਾਲੇ ਹਰੇਕ ਦਾਸ ਨੂੰ ਜੀ ਉੱਥੇ ਹੀ ਚਲਾਇਆ ਸਰ ਆਹ ਬੰਦ ਨੂੰ ਆ ਆ ਪੱਕਾ ਖੜਾ ਹੋ ਜਾਂਦਾ ਜੇ ਉਪਏ ਆਦੀ ਗਰ ਸਭ ਪੂਰੀ ਹੋ ਜਾਂਦੀ ਇਹ ਇਹਦਾ ਇਹ ਵੀ ਨੁਕਸਾਨ ਇਹਦਾ ਨੁਕਸਾਨ ਹੋਗਾ ਫੱਕੇ ਜਿੱਕਾ ਬਣਨੇ ਗਿੱਜਾ ਗਿੱਜਾ ਕਰੀ ਜਾਂਦਾ ਫਿਰ ਭਈ ਇੱਕ ਤਾਂ ਵਾਦਾ ਅਰਦਾਸ ਕਿਹਾ ਸੀ ਪੂਰੀ ਕਾਦੀ ਹੋਣੀ। ਪਰ ਕੋਈ ਨਾ ਨਹੀਂ ਪੂਰੀ ਹੋ ਤੂੰ ਤੂੰ ਭਈ ਆ ਕਰ ਮੇਰੀ ਜੀ। ਮੈਨੂੰ ਕਹਤਾ ਕਿ ਤੂੰ ਵਗਣੇਂ ਗੇ ਰੇ ਜ਼ਾ। ਨਾ ਬੁੱਝੂ ਰੋਈ ਜਾ ਉੱਪਰ ਚੜੇਗੀ। ਹੋ ਜਾਂਦੀ। ਜੂਈ ਵਾਰ ਵੇਖੋ ਕਰ। ਇਹ ਬੈਠੇ ਸਕੋਰ ਕਰਦਾ ਦਿਓ ਕੋਈ ਗੱਲ ਇਹ ਨਾ ਕੋਈ ਹੋਏ ਦੁਆਰਾ ਵੀ ਤੇ ਪੂਰੀ ਹੋਈ ਨਹੀਂ ਫਿਰ ਵੀ ਦੁਆਰਾ ਤਾਂ ਕੋਈ ਲੋਗ ਵੀ ਉਸ ਤਦ ਉਗਾ ਲੋ ਉਸ ਤਦ ਉਗਾ ਲੋ ਇਸ ਗੁਰੀ ਹੋ ਗਈ ਦੁਨੀ ਦੇ ਮੈਂ ਤਾਂ ਉੱਪਰ ਜਾ ਬਸ ਹਰ ਗੁੱਡੇ ਸੱਜੇ ਜਾ ਨੋ ਪੀਤਾ ਪਰ ਸਾਰਾ ਨਾ ਜਾ ਨਹੀਂ ਫਿਰ ਇਹ ਲਾ ਕੇ ਉਹ ਨੂੰ ਮੈਂ ਕਿਹਾ ਉਹ ਤਾਂ ਹੁਣੇ ਦਰਸਾਣ ਰੋਕਿਆ ਹੈ ਜੀ ਸਰ ਜੀ ਪਰਖਣਾਂ ਦੀ ਤਿਆਰਤਾ ਚ ਜੇ ਤਾਂ ਪਰਖਣਾਂ ਦੀ ਤਿਆਰਤਾ ਨੂੰ ਪੁਰਾਣਾ ਤਜਰਬਾ ਕਰਦਾ ਉਹ ਆਪਣੇ ਆਪ ਨੂੰ ਸੇ ਕਪੜਾ ਹੋਣ ਉਸ ਪਰਖ ਤੇ ਜੇ ਤਾਂ ਪਰਖ ਲਈਆ ਤਦੂਰ ਕਪੜਾ ਆਪਣੇ ਆਪ ਤੇ ਕੀਵਾ 3000 ਕੀ ਕਿਤੇ ਦੀ ਲੋਪਾਸੇ ਦੀ ਕੀਤੀ ਸਰਦਿ ਚਾਦਰਾਂ ਨਾਲ ਸਤਿ ਸ੍ਰੀ ਅਕਾਲ ਸਰਪੜਾ ਲਾ ਗਿਆ ਨਾਂ ਪੀਜੀ ਹੈ ਬਾਪ ਪਿਛੇ ਮਰਜ਼ਾ ਯਕੀਨ ਨਾਲ ਜੋੜਨ ਦੀ ਰਹੀ ਆਈ ਸੀ ਉਹਦੀ ਦਸਤ ਉਹ ਹੀ ਇੱਕ ਦੇ ਦਸਤੀ ਫਿਰਦੇ ਹਟਾ ਨਾ ਕਿ ਇਹ ਘਰੇ ਮਾਇਆ ਦੀ ਉਹ ਹੋਰ ਤਰ੍ਹਾਂ ਦੀ ਗੱਲ ਹੈ ਇੱਕ ਵੀ ਨ ਦੇ ਦਸਤੀ ਫਿਰਦੇ ਤੋਂ ਮੁਰਾ ਤੋ ਕਹਾ ਕਰੇ ਇਹ ਪੁੱਛਿਆ ਕਿ ਪਾਈਏ ਚੱਲ ਇਸ ਕਰਦਾ ਉਹ ਜਾ ਜਦਾ ਸਰਜਨੀਆ ਬੈਨ ਤੇ ਜੋ ਵੀ ਹੋਵੇ ਹੋ ਜਦਾ ਬੋਦਨ ਬੋਲਦੇ ਇਹ ਪਹਿਲੀਆਂ ਗੱਲਾਂ ਜਿਹੜੇ ਇਹ ਵੀ ਲਾ ਲੋਗੇ ਫਿਰ ਉਹ ਇੱਕ ਵਾਰ ਦਸਾਂ ਦਾ ਅਨੁਸਾਰ ਕਰ ਲਿਆ ਜੇ ਦਾਗਮਾਸਾਂ ਦਾ ਬਾਹਰ ਫਟਿਆ ਕੇ ਫੇਰ ਜੀ ਤੇ ਵੀ ਨਹੀਂ ਆਇਆ ਯਾਰ ਵੀ ਦਾ ਕਲੀ ਦਾ ਪੇਪਰ ਹਸੀ ਕਰਕੇ ਪਿੱਛੇ ਹਟਦਾ ਆਹ 10 ਵੀ ਫਿੱਚਲ ਵਿੱਚ ਤੇੜਾ ਕੀ ਜੋ ਚਲੂ ਗਏ ਕਿਬੀ ਰਿਆਪਾ ਲਸੋ ਮੂਰੋ ਸੋਹ ਕਹਾਂ ਕਰੇ ਕਹਾਂ ਕਰੇ ਕੀ ਕੀ ਦਾ ਮਹਾਪਰਦਾ ਮੰਨਦਾ ਕੋਈ ਗੱਲਾਂ ਕਰ ਕਰੀ ਜਾਂਦੇ ਚੌੜੇ ਹੋਈ ਜਾਂਦੇ ਨੇ ਹਜ਼ਾਰ ਸਾਲ ਮੁਸਲਮਾਨ ਆਦ ਕਰਦੇ ਉਹ ਕਿਉਂ ਕਰਦੇ ਕੋਦੋ ਕੋਈ ਗੱਲ ਨਹੀਂ ਦਾ ਗੱਲ ਨਹੀਂ ਮੰਦੇ ਜੇ ਤੱਕ ਜਿੱਦਿਆ ਰਾਮ ਜੀ ਤਰ ਫੇਰਤਾ ਜੇ ਸਿਆ ਸੁਰਵੰਗ ਬੁਰਾਈ ਦੇ ਛਾਇਦੇ ਜਿੱਤਿਆ ਪੱਲੇ ਬੋਤ ਗੋੜੀ ਜਿੱਤਿਆ ਫੇਰ ਬੁਰਾਈ ਦੇ ਛਾਇਦੇ ਜਿੱਤਿਆ ਫਿਰ ਬੁਰਾਈ ਦਾ ਨੋ ਹੋ ਪਾ ਗਿਆ ਮਦਾਨਤੀ ਕਿ ਤੂੰ ਜਾਂ ਤੁਸੀਂ ਮੰਨ ਲਿਆ ਬੁਰਾਈ ਤੇ ਅਛਾਈ ਦੀ ਫਟੇ ਹੁੰਦੀ ਹੈ ਤੁਸੀਂ ਜਿਹੜੀਆਂ ਜੇ ਬਾਹਰ ਮਹਮਦਾਨਾ ਉਹ ਵੀ ਨਹੀਂ ਸੀ ਹੋਰ ਉੱਥੇ ਆ ਕੇ ਜੋ ਜੂਨ ਪੋਲਿਸੀ ਹੈ ਰੋਸ ਜੀ ਆਲੋ ਵੀ ਸੀ ਅੰਕਸਰੀ ਸਾਰੀ ਹੋ ਨਹੀਂ ਮੀ ਜੀ ਬਦੋਂ ਤੇ ਅਨਮੋਟ ਕਰੋ ਮੈਨੂੰ ਹੈ ਇਹ ਦੇ ਬਿਆਨ ਦੇ ਸਤ ਸੰਗਤ ਹੈ ਗੱਭਰਾਂ ਦੇ ਸਟੇਟਸ ਦਾ ਦੰਦਾਂ ਮੈਂ ਦੇ ਗਿਆ ਜੰਨ ਦੇ ਗਾਉਂ ਉਹ ਜੰਨ ਹੈ ਨਾ ਇਹ ਜਦੋਂ ਦਰਦ ਦੇ ਨੂੰ ਗੱਲ ਨੂੰ ਮਤ ਪਾ ਲਵੇ ਰੰਗਰੇ ਆਉਂਦੇ ਜੀ ساری ਦੁਨੀਆ ਸੁਣਦੀ ਹੈ ਦੁਨੀਆ ਭਿਆਨੇ ਸੁਣਦੀ ਹੈ ਯਾ ਹੁੰਦੇ ਨਹੀਂ ਜਾਨ ਸੋਲ ਸੋਲ ਕਹੀ ਜੋ ਹਾਲ ਹਾਲ ਉਹਨੇ ਬਾਤਾਂ ਕਾਹੀਆਂ ਨਾ ਰੈਕ ਕਰਕੇ ਚਲੋ ਕਰ ਗੁਦਿਆਰ ਪਰ ਲੋਕ ਬਿਲਕੁਲ ਯਾਰ ਪਿਆਣਾ ਜੀ ਨਾ ਆ ਬਲਗ ਲਗਦਾ ਇਸ ਵਕਤ ਜਿੱਤੇ ਇਹਨਾਂ ਦੇ ਸਰਹਦਦਾਰੋ ਨੇ ਜਿਹੜੇ ਕੀਤਾ ਹੈ ਉਹ ਕਰਾ ਚੁੱਕੇ ਨੇ ਪੈਸਾ ਇਹਨਾਂ ਨੇ ਕਥਾ ਕਰਨਾ ਕਥਾ ਕਰਕੇ ਖਾ ਲੈਣ ਤਨਹਾ ਹਾਂ ਤਨਹਾਂ ਜਬਸ ਖਾ ਲੈਣ ਇਹ ਅਧਰਵਕੀ ਕਰ ਚੁੱਕੇ ਲੱਗੇ ਪਬਲਿਕ ਗ੍ਰੁੱਪ ਦੇ ਨੇ ਪੱਤਰ ਆਪੇ ਸਰ ਦੇ। ਇਹਦਾ ਪੂਨਾ ਇਹ ਕਰ ਵੀ ਨਹੀਂ ਮਸਲਾ ਫਿਕਰਜਾ ਜਲਾ ਵੀ ਪਸਾ ਪੈਸੇ ਸਰਜਾ ਪਬਲਿਕ ਦੇ ਦੰ। ਇਹਦਾ ਰਾਤੀ ਹੋਊਗਾ ਇਹ ਤਾਂ ਪਹਿਲਾਂ ਰਾਜੇ ਨਹੀਂ ਕਰੇ ਹੋ। ਤਸਨ ਕਰੇ ਹੋ ਉਹ ਇੱਕ ਤੋਂ ਪਹਿਲਾਂ ਜਿੱਦਾਂ ਉਸ। ਵੀ ਜਲੀ ਸਾਲ ਦੀ ਹਿਸਤੀ ਵੀ ਸਾਡੇ ਹੈ ਸਾਡੇ ਕੋਲ। ਸਰੰਤ ਫਾਇਰ ਹੈ ਪੱਜਾਰਾ ਜਗਤ ਸਾਡੇ ਇਹ ਵੀ ਇੱਕ ਦੋ ਪਰਾਰਾ ਦੀ ਹੈ ਜਿਹੜਾ ਆਉਂਦਾ ਪੱਜਾਰੀ ਵਾਰਡ ਦੇ ਸੰਪਰਕ ਨਹੀਂ ਪੱਜਾਰਾ ਦਾ ਕੋਈ ਦੇ ਬੰਦਾ ਗਏ ਹੀ ਬੈਠੇ ਸਵਾਦਾਂ ਤੋਂ ਦਾ ਕੋਲ ਤੁਹਾਡੇ ਸਿਰ ਦੇ ਰੇਟਕਤਾ ਦਾ ਬਨਾਸ਼ ਹੋ ਗਿਆ ਸਾਰਾ ਕੁਝ ਬਨਾਸ਼ ਹੋ ਜਾਂਦਾ। ਜਦ ਆਦਮੀ ਤੋਂ ਰੇਟਕਤਾ ਦਾ ਬਨਾਸ਼ ਹੋ ਗਿਆ ਨਾ ਸੱਚਾ ਬਨਾਸ਼ ਹੋ ਗਿਆ। ਭਾਰੇ ਥੱਕੇ ਨਾਰਿਆਂ ਸਭ ਕਦੇ ਨਹੀਂ ਫਰਵਾਹ। ਜੇ ਅਗਰਨਾ ਦਾ ਬਨਾਸ਼ ਹੋ ਗਿਆ ਸਭ ਕੁਝ ਬਨਾਸ਼ ਹੋ ਗਿਆ। ਉਬਾਲਤ ਦਾ ਸੱਚਾ ਬੁਲੇ ਗਿਲਾ ਕਰਨ ਜਦੋਂ ਉਹ ਟਾਈ ਆ ਗੁਣ ਬੱਤਾ ਬਚਾਊਗਾ ਔਗਨਹਾਰਾ ਬਣਾਊਗਾ ਔਗਨਹਾਰੇ ਚ ਲਊਂਗਾ ਗੁਣ ਬੱਤਾ ਬਣਿਆ ਹੋਇਆ ਜਿਆਦਾ ਨੂੰ ਹੀ ਖਤਮ ਕਰ ਦਊਗਾ ਨਾ ਅੱਪਲੇ ਬਾਬੂ ਵੀ ਕਿਦਾਂ ਕੇ ਖਤਮ ਕਰ ਉਹ ਚੁੱਪ ਨੂੰ ਇਹ ਬੇਸਬਕੀ ਮਾਰਦੀ ਹੈ ਗੁਣ ਨੂੰ ਸਭ ਜਮਾਰਦੀ ਹੈ ਉਹਨਾਂ ਨੂੰ ਤੇ ਮਾਰਦੀ ਗੋਲ ਉਹ ਤੇ ਸਭ ਤੋਂ ਗੋਡੀ ਹੈ ਇਹ ਲੋਕ ਤਾਂ ਕੋਣ ਦਾ ਸਭ ਕੋਲ ਹੋਈ ਸਾਕੇ ਗੋਲਦਾ ਕਿਆ ਕਹੂੰ ਦਸਤਕੇ ਗੋਲ ਮੈਂ ਕਿਆ ਕਹੂੰ ਉਹਨਾਂ ਦੇ ਗੋਲ ਇੱਕੀ ਤੇ ਸੀ ਜਿਹੜੇ ਇੱਕ ਛੱਡ ਕੇ ਦੂਜੇ ਪਾਸੇ ਲੱਗੇ ਸਰਕੇ ਗੋਲ ਉਹ ਗਾਉਂ ਪਾਟੀ ਗੋਲ ਦਸਿਆ ਬਸ ਉਹਨਾਂ ਗੋਟਾ ਇਹਨੇ ਗੁਨਾਹ ਨੂੰ ਨਹੀਂ ਝੱਲ ਗਏ ਉਹਨਾਂ ਇਹ ਗੋੜਾ ਗੁਨਾਹ ਨੂੰ ਤਨਾਫ ਕਰਦੇ ਨੇ ਤਰਾਂ ਆ ਬੋਲ ਜਿਸ ਤਾਜ ਤੋਂ ਨਾ ਵੀ ਚਾਰਾ ਤਾਪੋਂ ਕੀ ਜੇ ਸਦਮਨਸਤਾ ਮੇਠਾ ਇੱਕ ਸਰਕੇ ਨਾਤਾ ਜੇ ਇਹ ਕੋਈ ਸਰਕਾਰ ਸਾਡੇ ਕੋਲ ਆ ਨਹੀਂ ਦੱਸ ਪਹਿਲੀਆਂ ਵੀ ਲੈ ਲਉ ਇਹ ਕਰਕੇ ਜੇ ਸਾਡਾ ਤੁਹਾਨੂੰ ਚਾਰਾ ਦਿਨ ਵੀ ਦੱਸ ਦੋ ਲੈ ਲਿਆ ਅਗੇ ਅਪੀਲ ਵੀ ਕਰ ਸਕਦੇ ਕੋਈ ਜਲੀਲ ਨਹੀਂ ਹੈ ਇਹ ਰੋਕ ਨਹੀਂ ਸਕਦਾ ਬੱਚਾ ਕੋਈ ਸਭ ਨੂੰ ਸੁਣੋ ਸਾਡਾ ਸਾਡਾ ਉਹਨਾਂ ਦਾ ਨਾਮ ਇਹ ਕਾਹਦਾ ਵੀ ਜਾਏਗਾ ਜੇ ਅੱਜ ਬਟਕਮਾਲੀ ਦਾ ਉਹ ਐਦਾਂ ਨੂੰ ਬਟਕਾ ਲਾਉਣੇ ਵਾਸਤੇ ਕਿਰਾਨੀਆ ਬਟਕਾ ਪਿੱਛੇ ਵਾਸਤੋ ਤਾਂ ਉਹ ਫੈਰੀਟੇ ਇਨ ਇਹਦੇ ਉੱਪਰ ਲਿਖਿਆ ਹੀ ਸੀ ਸਤੂ ਹੀ ਲੱਗ ਰਿਹਾ ਹੈ ਇਹ ਪੂਰੀ ਫੈਰੀਟੇ ਹੈ ਤਾਂ ਕੋਈ ਘੋਰਾ ਸਿੱਧਾ ਫੈਰੀਓ ਜਿੱਡੇਗਾ ਹੋ ਜੇ ਬਈਆ ਪਰ ਚੋਦਾਏਗਾ ਉਸ ਆਪਾਂ ਦੇਖੀ ਗਦੇ ਬਈਆ ਪਈਆ ਹੋਰ ਕੋਣੇ ਪਈਆ ਤੁਹਾਡੇ ਕੋ ਕੋਈ ਨਹੀਂ ਰਸੂ ਲੈਖਾ ਕਿਤੇ ਕਿਹੜੇ ਮੇਰੀਏ ਤੁਸੀਂ ਹੈ ਤਾਂ ਤੇਰੀ ਦੱਸੇ ਹੀ ਉਹ ਨਹੀਂ ਕਦੇ ਗਈ ਜੈਤੋ ਅੱਡੀਆ ਉਹ ਦਿਸ ਛੋਟੀ ਬਲਾਹਤ ਗਈਆ ਮੈਂ ਬੋਲੀ ਉਹਦੀ ਬੜੀ ਮੇਰਾ ਮੇਰੇ ਵਿੱਚ ਨਹੀਂ ਜੋ ਵੀ ਯਾਰ ਹੁੰਦਾ ਨਾ ਬੋਲੀ ਉਹਦੀ ਬੰਦੀ ਆ ਉਹ ਚੋਦੀ ਬੰਦੀ ਮੇਰੀ ਉਹ ਤਾਂ ਤੋੜ ਕੇ ਰੱਖਣੀ ਉਹ ਤੁਰਦੀ ਬੀਵੀ ਉਥਾਰੀ ਵੀ ਆ ਹੁਣ ਵੀ ਬਰਖੰਦਾ ਤਾਂ ਉਹਦੇ ਕੋਲੇ ਅਧਿਕ ਕਿਤੇ ਕਹਿੰਦੇ ਹਾਂ ਸਾਡੀ ਹਾਂ ਸਾਡੀ ਸਭ ਜਿਹੜੀ ਬੇਸਮਝੀ ਨਾ ਕਹਿਦੇ ਨਾ ਸਾਡੀ ਬੇਰੀ ਮੇਰੀ ਕਰਦੇ ਜਾਨ ਨੂੰ ਮੇਰੋ ਅੱਜ ਸਮਝਾਊਗਾ ਲਕੀ ਅੱਜ ਸਮਝਾਊਗਾ ਕੀ ਹੈ ਸਾਰਾ ਜਾਣਨਾ ਤੇਰੀ ਤੇ ਮੇਰੀ ਤੇ ਦਰਿਆ ਮੇਰੀ ਤੁੰਤਰੀ ਓਏ ਸਹੀ ਹੈ ਤੇਰੀ ਓ ਜਿਹਨੇ ਦੇਖ ਲਈ ਉਹ ਰੁੱਸ ਗਿਆ ਸੇਰੀ ਮੇਰੀ ਕੱਟਿਆ ਗਿਆ ਉਹ ਕਾਲੀਆਂ ਜਿਹੜਾ ਬੈਂਕ ਦੇ ਪਾਸੇ ਪੈ ਕਾਲੀਆਂ ਗੰਦੀਆਂ ਰੋਇਆ ਦੇ ਘਰ ਜਾ ਦੇ ਘਰ ਜਾ ਦੇ ਕਹਿਦਾ ਕਾਲੀਆਂ ਕਸ ਕੇ ਕਰ ਤੇ ਜਿਹੇ ਦੀ। ਹਰ ਵਾਰੀ ਪਸੂਨੇ ਪੜ੍ਹਦਾ ਵਾਰੀ ਬਾਤ। ਉਹ ਵਿਦਵਾਨ ਨੇ ਦੱਸਾਤਾ ਤੇਰੀ ਮੈਡੀਕਲ। ਜੇ ਬ੍ਰੀਡ ਕਰੀ ਜਾਂਦੇ ਉਹ ਦੇਖ ਕੇ ਖੁਸ਼ ਉੱਛੇ ਬੰਗਿਆ ਉਹਦਾ ਹਿੰਦੀ ਵੀ ਨਹੀਂ ਆ ਦੂਏ ਦਾ ਦਰਫਤਾ ਹਿੰਦੀ ਵੀ ਨਹੀਂ ਦਾ ਗੱਡੀ ਆਪਣੇ ਕਾਲਾ ਪੱਛਾ ਨੂੰ ਜਾ ਕੇ ਮਨ ਲਾਗਾ ਪ੍ਰਭ ਮਿੱਠਾ ਸਰਬ ਸੁਖ ਮਨ ਗੁਠਾ ਜਾ ਕੇ ਬੰਲਾਗਾ ਪ੍ਰਭ ਮਿੱਠਾ ਸਰਬਸਤ ਤਰੂ ਦੇਖੋ ਪ੍ਰਾਪਤਾ ਅਸਨ ਅਰਜਨ ਅਸਨ ਨੂੰ ਪਸੇ ਇਹਦੇ ਨੂੰ ਤਾਂ ਰੱਖ ਲੈਣਗੇ ਇਹਦੇ ਨੂੰ ਹੋ ਰੱਖਣਾ ਮਤਲਬ ਹੈ ਕਿ ਕਿਤੇ ਕੋਈ ਨੂੰ ਮਿਟਾ ਉਹਨਾਂ ਦੇ ਕੋਈ ਉਹਨਾਂ ਨੂੰ ਸਮਝ ਨਹੀਂ ਆਉਣੀ ਪ੍ਰਾਪਰ ਨੂੰ ਬਰਗਮਾ ਦਾ ਪ੍ਰਭ ਤੇ ਆਦਮੀ ਉਹ ਮਿਟਾ ਲੈ ਮੈਨੂੰ ਪ੍ਰਾਪਰ ਵਿੱਚ ਹੈ ਆਪਾਂ ਚਾਹੀਦੇ ਦੇਖੋ ਨਾ ਪ੍ਰਾਪਰ ਇਹ ਤਾਂ ਕੋ ਖਾਣ ਵਾਲਾ ਚਾਹੀਦੀ ਹੈ ਕੋਈ ਜੀ ਇਹ ਬੋਲਣ ਦਾ ਬਿਠਾ ਚਾਹੀਦਾ ਬਿਠਾ ਬੋਲਣਾ ਜੀ ਬਿਠਾ ਬੋਲਣਾ ਜੇ ਰਸੋਈ ਪਰਬਾ ਸਭੇ ਕੇ ਰਹਿੰਦੇ ਕਿਆ ਬ੍ਰੰਤਰਾ ਆਤਮਾ ਦੇ ਰਾਮਕ੍ਰਿਸ਼ਨਾ ਦੇ ਬੋਲਣਾ ਜੀ ਜੀਜਾ ਤਾਂ ਕੋਈ ਹੈ ਜਦੋਂ ਉਹ ਨੰਬਰ ਮਾਤਾ ਫੜ ਫੜ ਪਰਬ ਜੇ ਰਾਮ ਬੋਲਦਾ ਉਹ ਅਸ ਪੂਰਾ ਹਗਣਾ ਜੇ ਉਹ ਖਦੀ ਬਨ ਜੇ ਬਨ ਕੋਈ ਹੋਰ ਬਣਦਾ ਜੇ ਤਾ ਪ੍ਰਭ ਉਹ ਨਾ ਕਰਦਾ ਜੀ ਜਰਾ ਆਪ ਦਾ ਜੀ ਜਿਹੜਾ ਹੋਣਾ ਉਹ ਜੀ ਜਿਹੜਾ ਪ੍ਰਭ ਹੁੰਦਾ ਸੀਨੀਅਰ ਦਾ ਸੀਨੀਅਰ ਹੋ ਰਹੋ ਦੋਸਤ ਜਿਹੜਾ ਹੈ ਇਹ ਉਹ ਪੂਰੀ ਜਾਰ ਪਦਾਰਥ ਦੇ ਹੁਣ ਪਹਿਲੀ ਸੇ ਦਾ ਪ੍ਰਭ ਸੁੰਦਰ ਹੈ ਸੁਸਰਾਤਰ ਹੈ ਸਭ ਤੋਂ ਦਾ ਬਰਾਬਰ ਜਿਹੜਾ ਹੈ ਉਹ ਜੀ ਏ ਪਹਿਲੀ ਸੇ ਦਾ ਪਰਮ ਸਿੱਖ ਜਦੋਂ ਬੰਬਾਂ ਦੇ ਬੋਤਲਾਂ ਕਿ ਇਹ ਗੱਲ ਸਮਝ ਨਹੀਂ ਆ ਰਹੀ ਉਹ ਹੁਣ ਇਹ ਪਹਿਲੀ ਸੇ ਦਾ ਪਰਮ ਤਾਂ ਦਸ ਵਾਰ ਤੁਰਾ ਪਾਠੇ ਪਾਵਾ ਪਹਿਲੀ ਸੇ ਚੱਲ ਗਈ ਹਾਂ ਜਿਆ ਤੇ ਮਨ ਲੱਗਾ ਪਰਮ ਮਿੱਠਾ ਸਰਬ ਸੂਤ ਤੰਦੂ ਵਰਗਾ ਪਾ ਉਹ ਇਹਨੂੰ ਸੱਚ ਵੀ ਕਹਿ ਸਕਦੇ ਆਂ ਜਿਹਦੇ ਮਨ ਨੂੰ ਸੱਚ ਮਿੱਠਾ ਲੱਗਿਆ ਸੱਚੀ ਗੱਲ ਮਿੱਠੀ ਲੱਗਦੀ ਗੁਰਬਾਣੀ ਬਸੇ ਲਾਜੀ। ਸਤਿ ਆਕ ਤੇ ਆਰ ਬਚਾ ਲਾ ਗਿਆ। ਰਬ ਮਿੱਠਾ। ਸਾਜ ਨੂੰ ਬਤਾਉ ਹੁ ਬੰਦੂ। ਐਂ ਜੇ ਉਹ ਤਾਂ ਪਿਸਾਰੇ ਤੋਂ ਨਾ ਉਹਦੇ ਬੁੱਢੇ ਵਿੱਚ ਇਕੱਠੇ ਰਹਿਣ ਪੈ ਜੀ ਕੋਦ ਅੰ। ਮਿੱਠਾ ਲਾ। ਹਾਂ। ਇਹੋ ਮਿੱਠਾ ਲਾ ਗਿਆ। ਕੋਦ ਅੰਸਾਰੇ ਉਹਦੇ ਮੇਰੇ ਜੀ ਕਰਦਾ ਜੀ ਬਸ। ਐਨੀਆ ਵੀ ਬਾੜੀ ਵਰ ਯੋਨ। ਜੋਨੇ ਲੋਗ ਕਦੇ ਹਟਾ ਲੋ ਫੇਰੋ ਜਿਸੋਗਰ ਉਹ ਦੀ ਜਨ 28000 ਦਾ ਜਿਹੜਾ ਉਹ ਗੱਲ ਜੀਹਰਾ ਕਹਿੰਦਾ ਜੀਹਰਾ ਤੇ ਜੀਹਰਾ ਦਾ ਤਾਰੀਖਾ ਜੀਹਰਾ ਕਹਿੰਦਾ ਜੀਹਰਾ ਸਾਲਾ ਢੋਲਿਆ ਜਾਂਦਾ ਹਾਂ ਜਿਸ ਜਨ ਆਪਣਾ ਹੁਕਮ ਬਣਾਇਆ ਸਰਬ ਲੋਕ ਜੀ ਆਪਣਾ ਬਾਤ ਹੋ ਜੂਗੀ ਬਾਤ ਬਹੁਤ ਹੀ ਗੜੀ ਸਰਬੋਤਮ ਸਾਡੀ ਥੋਕ ਸਭ ਜਾਨਾ ਬਚੀ ਆਪਣਾ ਹਕਮ ਬਨਾਇਆ ਸਰਬ ਆਪਣਾ ਰੂਪ ਬਣਾ ਲਿਆ ਸਾਰੇ taraf ਵਿਚ ਫਾਇਦਾ ਸਰਬ ਥੋਕ ਨਾਲ ਇਸ ਤਰ੍ਹਾਂ ਪਾਉਂਦਾ ਤੋਂ ਵਰਤੋਂ ਫਰੋਕ ਤੋਂ ਸਭੇ ਥੋਕ ਪ੍ਰਾਪਤੇ ਵਾਹ ਕੰਟਰੋਲ ਨਾ ਹਟਾ ਮਤਲਬ ਆਇਆ ਦੋ ਟੋਟਲ ਟੋਟਲ ਸੇਲ ਦਾ ਗਿਆ ਸੇਲ ਨੋਵ ਦੇ ਜਾਂਦੇ ਆਤਮ ਗਿਆ ਗਿਆ ਸੇਲ ਨੋਵ ਦੇ ਵਿੱਚ ਆਤਮ ਗਿਆ ਗਿਆ ਮਾਇਰ ਗਿਆ ਦੇ ਲੋਕ ਕੀ ਬਕਤਾਂ ਕਹੇ ਲੋਕ ਦਾ ਗਿਆ ਗੁਰਬਾਨੀ ਕਰ ਲੋਕ ਦਾ ਗਿਆ ਮਤਲਬ ਹੁਣਾ ਜੜਾ ਹਰ ਵੀ ਨਹੀਂ ਕੇ ਹਾਓ ਫਿਰ ਕੋਟਾ ਚੀ ਗੋਟਿਆ ਫਸਦਾ ਰੂਪ ਦਸਮੇ ਰੂਪ ਪਰ ਹੈ ਜੜਾ ਗੁਰੂ ਦਾ ਨਾਲ ਹੱਥ ਫੜੇ ਜਾਉਗਾ ਵੀ ਚਿਆ ਚਿਆ ਚਿਆ ਗਾਣ ਆਪਣੀ ਦੇ ਰਾਸ ਦਾ ਪਿੰਡ ਵਰਦੇ ਹੁਣ ਉਹ ਇਹ ਉਕਾਰ ਖਤਰ ਨੂੰ ਕਰਤਾ ਫਰਸ਼ ਨੇ ਪਾ ਦੇ ਬਾਰੇ ਖਾਲਸਾ ਜੁੱਤੀ ਸਰਪ ਤੇ ਇਹਾਰੇ ਥੋਕੇ ਦੀ ਜਸਤ ਇੱਕ ਥੋਕ ਆ ਗਏ ਤੇ ਬੁਖਮੀ ਹੋ ਗਿਆ ਜੇ ਤੇ ਪਾ ਲਿਆ ਭੈ ਬੰਦੀ ਤੇ ਪਾ ਲਿਆ ਬੱਚੇ